ਲੋਕ ਉਹ ਉਰਤਾਰੇ ਜੋ ਅੰਤਰਨਾਮ ਸਰਬ ਦੇ ਦੇਖੇ ਭਗਵਾਨ ਨਿਮਕ ਨਿਮਕ ਥਾਕਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਹਾਂ ਅਪਰਸ ਲਬ ਜਾ ਗਿਆ ਅਪਨ ਸੋ ਨਾ ਜਿਹਨੂੰ ਸਪਸ਼ਟ ਨਹੀਂ ਕਰ ਸਕਦੇ ਤੁਸੀਂ ਛੋਣ ਨਹੀਂ ਸਕਦੇ ਉਹ ਆਤਮਾ ਜਿਹੜੇ ਕਹਿੰਦੇ ਅਸੀਂ ਸਰੀਰ ਨਹੀਂ ਕ੍ਰਿਸ਼ਨ ਕਹਿੰਦਾ ਜੋ ਮੈਂ ਦੀਨ ਹਾਂ ਮੈਂ ਕ੍ਰਿਸ਼ਨ ਨਹੀਂ ਜੋ ਮਹੌ ਦੀਦਾ ਦੀ ਉਹ ਪਰਸ ਕੋ ਸਪਰਸ਼ਨੀ ਹੋ ਸਕਦਾ ਜਿਹਨੂੰ ਅਸੀਂ ਛੂ ਨਹੀਂ ਸਕਦੇ ਉਹ ਪਰਸ ਉਹ ਤਾਂ ਵਿਰਾਸਤ ਹੈ ਸਤਿ ਆਚਾਰ ਕੇ ਬ੍ਰਮ ਗਿਆਨੀ ਤੋਂ ਪਰਸ ਤੇ ਲੈ ਸ਼ਲੋਕ ਦੇ ਵਿੱਚ ਪਹਿਲਾ ਅਗਲੇ ਸ਼ਲੋਕ ਉੱਪਰ ਹੋਰ ਚੱਕਦੇ ਨਾ ਥੋੜੀ ਜੀ ਸਾਰ ਟੈਟ ਹੋਰ ਕਰਤੀ ਥੋੜੀ ਥੋੜੀ ਸਾਰ ਟੈਟ ਕਰਦੇ ਤਾਂ ਕਿ ਫੋਲੋ ਕਰਦਾ ਆਵੇ फॉलो भी ਕਰਨਾ करना ਜ਼ਿਆਦਾ ਫਰਸਾ ਦੀਓ ਫਿਰ ਫੋਲੋ ਹੀ ਕਰ ਸਕੋ ਜਿੱਥੇ ਕਦਮ ਛੱਡਿਆ ਜਿੱਥੇ ਸਟੈਪ ਉਦੋਂ ਹੀ ਅਗਲਾ ਸਟੈਪ ਨਾਲ ਲੈ ਜਾਓ ਜੇ ਦਸ ਸਟੱਪ ਵਿੱਚ ਆ ਜਾ ਨਾ ਹੁਣ ਜੇ ਕੋ ਬਚਾਲੇ ਤਾਂ ਉੱਥੇ ਚੜੀ ਉਹ ਤਾਂ ਉਸ ਹਿਸਾਬ ਤੇ ਚੜ ਗਈ ਆ ਜਿਹੜਾ ਆਤਮ ਗਿਆਨ ਤਾਂ ਕਰ ਲਵੇ ਜਿਹੜਾ ਅਗਲੀ ਸ਼ਬਦ ਕੀ ਹੈ ਸਰਬਮੈ ਤੇਖੇ ਭਗਵਾਨ ਇਹ ਨਾ ਹੋਵੇ ਵਿਆਹ ਹਰਿਆਣਾ ਆਹ ਖੱਤਰੀ ਆ ਬੈਸ਼ਾ ਸੂਤਰ ਆ ਬ੍ਰਾਹਮਣ ਕਾਹ ਗਰੀਬ ਆਏ ਘਟਿਆ ਵਧੀਆ ਆ ਰੂਪ ਹੈ ਖਰੂਪ ਹੈ ਬਿਲਕੁਲ ਸਾਰਿਆਂ ਚ ਭਗਵਾਨ ਦੇਖੇ ਸਰਬਮੈ ਦੇਖੇ ਭਗਵਾਨ ਸਰਬ ਕੀ ਜਰਾਸੀ ਲਖ ਜੂਨ ਚ ਦੇਖੇ ਸਰਬ ਦੇ ਵਿੱਚ ਤੱਕ ਕਿਹੜਾ ਆਉਂਦਾ ਹੈ ਜਰਾਸੀ ਭਗਵਾਨ ਸਾਰਿਆਂ ਚ ਦੇਖੇ ਨਿਮਕ ਨਿਮਕਾ ਨਮਸਕਾਰ ਇਸ ਕਰਕੇ ਬੜੀ ਅਧਿਨਗੀ ਨਾਲ ਤੇ ਨਾਲ ਜੁਬਰਤਾ ਨਾਲ ਠਾਕੁਰ ਦੇ ਜੇ ਆਪਣਾ ਜਿਹੜਾ ਅਸਰਾ ਸੱਚ ਕੋਲ ਉਠਾ ਕੇ ਸਾਚ ਨੂੰ ਮੈਂ ਕਹਿੰਦਾ ਨਾ ਕਿ ਸੱਚ ਸਭਨਾ ਦਾ ਖਾ ਸਮਾ ਖਾ ਨੂੰ ਉਠਾ ਸੱਚ ਦੇ ਅੱਗੇ ਵੀ ਦਾ ਜਪ ਤੱਕ ਕਰੇ ਉਹਦੇ ਅੱਗੇ ਝੁਕਣ ਸੱਚ ਕੋਈ ਵੀ ਗੱਲ ਵਿੱਚ ਕੋ ਨੂੰ ਮੰਨਣਾ ਜਿਹਾ ਅਚਲ ਕਦੇ ਵੀ ਉਹ ਮੰਨਣ ਜਿਹਾ ਜੇ ਨਹੀਂ ਕਰੇ ਬਿਲਬੁਲ ਨਹੀਂ ਕਰੇ ਸੱਚ ਜਦ ਕਰ ਲੈ ਸੱਚ ਜਦ ਹੋਵੇ ਚਾਹ ਤ ਐਕਸੈਪਟ ਕਰ ਲੈ ਕਿਤੇ ਵੀ ਹੋਵੇ ਕਿਤੇ ਵੀ ਕੋਈ ਵੀ ਜਦ ਵੀ ਕਿਸੇ ਕੋਲ ਹੋਵੇ ਉਹਦੇ ਨਾਲ ਜਦ ਹੀ ਹੋ ਸਹਿਮਤੀ ਨਾਲ ਹਾਂ ਬਿਲਕੁਲ ਸਹੀ ਹੈ ਰੱਖ ਵਿਵਗਤ ਸਹਿਮਤ ਹੋਣ ਦੇ ਵਿੱਚ ਜਿਹੜੀ ਲੋੜ ਹੈ ਸਾਧਗੁਰੂ ਨਮਸਕਾਰੇ ਨਿਮਕ ਨਿਮਕ ਸਾਧਗੁਰੂ ਨਮਸਕਾਰੇ ਹਾਂ ਭਈ ਮਨ ਮਨ ਹੋ ਗਿਆ ਨਾਲ ਕੋ ਕੋ ਪਰਸ ਸਗਲ ਵਿਸਤਾਰ ਹੋਇਆ ਫੇਰ ਉਹ ਪਰਸ ਜੇ ਉਹ ਆਪਣਾ ਸੱਚ ਕੋਈ ਵੱਖਰਾ ਮੰਨੇ ਬੈਠਾ ਔਰ ਦੁਬਾ ਸੱਚ ਦੁਨੀਆ ਪਰਦਾ ਲਿਆ ਕੇ ਤੇ ਹੀ ਨਵੇ ਕਰੀ ਜਾਂਦਾ ਉਹ ਪਰਸ ਨਹੀਂ ਹੋਏ ਆਤਮਾ ਦੇ ਲੈਵਲ ਤੇ ਗਏ ਨਹੀਂ ਹੋ ਆਪਣਾ ਸੱਚ ਉਹਦਾ ਵੱਖਰਾ ਕੋਈ ਮੰਨੇ ਹੋਰ ਸੱਚ ਨੂੰ ਉਹ ਜਪਕ ਤੱਕ ਕਰਦਾ ਵੀ ਇਹ ਨੂੰ ਵੱਡਾ ਕਰਾਉਂਦਾ ਉਹ ਪਰਸ ਦੀ ਹੈ ਉਹ ਪਰਸ ਦੀ ਹੈ ਪਰਸ ਜਿਆਦਾ ਹੈ ਚਾਹ ਨਮਕ ਨੂੰ ਇਕੱਠਾ ਕਰ ਨਮਸਕਾਰ ਹੈ ਨਾਲ ਕੋਹ ਪਰਸ ਸਗਲ ਸਗਲ ਨੇ ਇਸ ਤਰ੍ਹਾਂ ਦੁਨੀਆ ਦਾ ਕੋਈ ਵੀ ਬੰਦਾ ਹੋਵੇ ਉਹ ਉਹ ਉਹਦੀ ਅਗਿਆਨਤਾ ਨੂੰ ਦੂਰ ਕਰ ਸਕਦਾ ਉਹਦਾ ਪਰਪ ਦੂਰ ਕਰ ਸਕਦਾ ਜਿਸ ਦੀ ਰਾਤ ਅਗਿਆਨਤਾ ਉਹ ਜੋ ਬਾਰ ਕਰ ਸੋ। ਭਾਵੇਂ ਤਾਂ ਜੋ ਬਾਰ ਕਰ ਸੋ। ਕੋਈ ਵੀ ਬੰਦਾ ਹੋਵੇ ਜੰਮ। ਭਈ ਭਾਸ਼ਾ ਦਾ ਫਰਕ ਉਹ ਭਾਸ਼ਾ ਕੋਈ ਹੋਰ ਵਿਚਾਲੇ ਕੋਈ ਲੈ ਸਕਦਾ ਬੰਦਾ। ਭਾਸ਼ਾ ਉਹਨਾਂ ਆਪਾਂ ਜੇ ਪੰਜਾਬੀ ਬੋਲਦੇ ਆਂ। ਕੁਝ ਐਸੇ ਵੀ ਲੋਕ ਨੇ ਜਿਹੜੇ ਹਜ਼ਰ ਜਿਵੇਂ ਅੱਧੀ ਹੋਈ ਚੀਜ਼ਾਂ ਜਾਣਦੇ ਨੇ। ਉਹੋ ਲਈ ਜਾਸਾ ਦੇ ਭਾਸ਼ਾ ਦੇ ਵਿੱਚ ਵਿੱਚ ਇੰਟਰਪ੍ਰੀਟਰ ਲਾ ਕੇ ਆਉਤਾ ਮਦਦ ਲਈ ਜਾਸਾ ਦੀ ਇਹ ਬਿਸ਼ੇ ਦੀ ਭਾਸ਼ਾ ਵਾਸਤੇ ਸਰ ਪਰ ਉਹਦੀ ਆਪਣੇ ਆਪਣੇ ਭਾਸ਼ਾ ਦੇ ਵਿੱਚ ਉਹਦੇ ਚੰਗਲੇ ਭਾਸ਼ਾ ਦਾ ਦੁਨੀਆਂ ਦੇ ਵਿੱਚ ਕੱਲ ਲੈਣਾ ਹੁੰਦਾ ਹੈ ਕੋਈ ਭਾਸ਼ਾ ਚੋਂ ਹੋ ਜਾਂਦਾ ਨੇ ਉਹ ਅਪਰਸ ਤਕੋ ਉੱਥੇ ਜੇ ਤਾਂ ਵਖਰਾ ਬਸ ਜਿਆਦਾ ਅਸਲਿਆ ਪਰਸਤੋਈ ਕੋ ਸ਼ਬਦ ਮਾਇਆ ਉਲ ਉਪਰ ਖੇਲਾ ਲੱਗਦਾ ਨਾ ਪੁਰਖ ਪਰਸਤੋਈ ਬਣੇ ਪੂਰਾ ਕਰਨ ਵਾਲਾ ਪੁਰਸ਼ ਪਰਸਾ ਕਹਿੰਦੇ ਹੁੰਨੇ ਪਹਿਲਾਂ ਉਹਨਾਂ ਨੂੰ ਰਜੀ ਸਗਲ ਨੇ ਸਾਰੇ ਸਾਰਿਆਂ ਦਾ ਪਰਸ ਹਾਂ ਪਹਿਲਾ ਮਾਈ ਮੁੰਡੋ ਤੇ ਗੁਰੂ ਕੀ ਜਾਤੇ ਪਰ ਬਣ ਜਾਏ ਕੋਈ ਇਹ ਤਾਂ ਕਹਿਣਾ ਸੀ ਜਿਹਦਾ ਪਰ ਕਿਸੇ ਦਾ ਨਹੀਂ ਪਰ ਪਰਜਾਉ ਦਾ ਬੇਅਸੀ ਦਾ ਪਾਣੀ ਦਾ ਉਹ ਜਾਨਵਰਾਂ ਦੀ ਤਾਂ ਗੋਲੀ ਨਹੀਂ ਜਾਨਵਰਾਂ ਦਾ ਵਿਸ਼ਾ ਸੀ ਸਗਲ ਨੇ ਸਾਰਾ ਸਭ ਬਾਸਤੇ ਹੀ ਪਰਬਦੂਰ ਹੋ ਸਕਦਾ ਕੀਤਾ ਜਾ ਸਕਦਾ